शलोक महल्ला तीसरा बिन सतगुरु सेवा जी के वंदना विच होमए कर्म कमाहि बिन सतगुरु सेवा थोर ना पावै मर जम्मे आवे जाहि नहीं करता अपने बारे चलदा है जी जेड़ा वंदना विच बंधन टूटदे नहीं हो जांदे जी के बंधन ਜਦੋਂ ਮੈਂ ਕਰਮ ਕਮਾਏ ਹਮੇਸ਼ਾ ਕਰਦਾ ਰਹਿੰਦਾ ਹੈ ਆਏ ਮੈਂ ਕਰਦਾ ਰਹਿੰਦਾ ਹੈ ਬਿਨ ਸਤਗੁਰ ਸੇਵੇ ਕਿੱਟ ਕੰਮ ਦੀ ਰੂਹ ਰਹਿੰਦਾ ਪਰ ਜਦ ਮੈਂ ਆਵਾਜਾਈ ਕਰਦਾ ਬੱਸਦਾ ਰਹਿੰਦਾ ਆ ਠੀਕ ਹੈ ਜੀ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਵਸਦਾ ਹੈ ਮਨ ਮਾਹੀਂ ਨਾਨਕ ਵਿੱਚ ਸਤਿਗੁਰ ਸੇਵੇ ਜੰਪੁਰ ਬੱਧੇ ਮਾਰਿਐਨ ਮੂਹ ਕਾਲੇ ਉਠ ਜਾਹੀਂ ਆ ਜਿਹੜਾ ਫਿੱਕਾ ਬੋਲਦੇ ਨੇ ਸੰਤ ਸੇਵੇ ਫਿੱਕਾ ਬੋਲਣਾ ਫਿੱਕਾ ਫਰਾਂ ਫਿੱਕਾ ਬੋਲਣਾ ਹੁੰਦਾ ਜਿਹਦੇ ਸੱਚ ਦੀ ਗੱਲ ਨਾ ਹੋਵੇ ਅੱਛਾ ਜੀ ਜਿਹਦੇ ਸੱਚ ਦੀ ਗੱਲ ਨਾ ਹੋਵੇ ਠੀਕ ਹੈ ਜਿਹਦੇ ਦੀ ਅੱਖਿਆ ਨਾ ਹੋਵੇ ਫਿੱਕਾ ਬੋਲਣਾ ਹੁੰਦਾ ਨਾਨਕ ਫਿੱਕਾ ਬੋਲੀਏ ਤਨ ਗੁਰ ਫਿੱਕਾ ਹੋਵੇ ਤੇ ਉਹ ਜਿਹੜੀ ਕੱਚੀ ਬਾਣੀ ਪੜਦੇ ਆ ਉਹ ਫਿੱਕਾ ਬੋਲਣਾ ਹੈ ਜੀ। ਉਹ ਜਿਹੜੇ ਕੱਚੀ ਬਾਣੀ ਪੜਦੇ ਨੇ ਇਹਨਾਂ ਨੂੰ ਕੋਈ ਪੀੜਾ ਗਿਆਨ ਨਹੀਂ ਨਾਨਕ ਬਿਨ ਸਤਗੁਰੂ ਸੇਵਾ ਜੰਪੂਰ ਮਾਰੀਆਂ ਨੂੰ। ਉਹ ਜੰਪੂਰ ਬੰਦੇ ਮਾਰੀਆਂ ਚਾਹ ਜੇ ਲੋਕ ਲੈ ਹੋ ਜਾਂਦਾ ਹਾਲ ਹੁਣ। ਕੱਲੇ ਚੋਲੇ ਬਦਲੇ ਤੇ ਗੱਲ ਨਹੀਂ ਪੜਨੀ ਕੱਲਾ ਤੇਗ ਬਦਲੇ ਤੇ ਗੱਲ ਨਹੀਂ ਪੜਦੀ। ए, मन बदले ਬਦਲੇ ਤੇ ਗੱਲ ਬੰਦੀ ਓ ਤੇਰ ਨਾ ਵੀ ਬਦਲੋ ਮਨ ਬਦਲ ਲਓ ਕਹਤਾ ਬੰਦੇ ਬਦਲ ਤੇ ਮਨ ਤੇ ਗੁਰਬਾਨ ਦਾ ਅਸਰ ਹੋਵੇ ਤਾਂ ਕੋਈ ਬੈਰੀ ਨਾ ਹੈ ਮਜ਼ਾਨਾ ਹੋਵੇ ਥੇਰ ਗੱਲ ਬੰਦੀ ਆ ਮਾਇਆ ਦੀ ਭੁੱਖ ਢੇੜੇ ਢੇੜੇ ਬਣਾ ਰਹੇ ਧਰਮ ਨੂੰ ਉਹ ਕਾਲੇ ਉੱਡ ਜਾਣ ਕਾਲੇ ਮੂੰਹ ਹੀ ਲੈ ਕੇ ਉੱਡ ਜਾਂਦੇ ਨੇ ਕਾਲੇ ਮੂੰਹ ਦਾ ਵਦਨਾ ਮੁਰ ਕਾਲਾ ਲੈ ਕੇ ਚਲੇ ਜਾਂਦੇ ਹੋਰ ਕਾਲਾ ਕਰਕੇ ਚਲੇ ਪਹਿਲਾ ਜਿਤ ਮੈਂ ਪਿਆਰਾ ਵਿਚਰੈ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੈ ਜਿਹੜੀ ਰੀਤ ਹੈ ਜਿਹਦਾ ਨਾਲ ਸਾਹ ਦਾ ਪਿਆਰਾ ਉਨੂੰ ਸਾੜਦੇ ਹੋ ਅੰਦਰ ਦੇ ਵਿੱਚ ਉਹ ਦੂਣੇ ਲਾਉਣੇ ਉਹ ਪ੍ਰੀਤ ਰਮ ਰੀਤ ਨੂੰ ਛੱਡਦੇ ਉਹ ਜਿਹੜੀ ਰੀਤ ਤੋਂ ਦੂਰ ਤੇ ਪਾਸੇ ਲੈ ਸਾਹਿਬ ਨਾਲ ਪ੍ਰੀਤ ਤੋੜ ਕੇ ਸੰਸਾਰ ਨਾਲ ਪ੍ਰੀਤ ਰੀਤ ਛੱਡਦੇ ਹੋ ਬਾਕੀਆਂ ਨਾ ਛੱਡੋ ਹੋਰ ਬੁਧੀ ਦੇ ਅੱਗੇ ਸ਼ੋਰਟੇਜ ਐ ਐਸੀ ਰੀਤ ਨੂੰ ਪਿਉ ਨਹੀਂ ਛੱਡਦੇ ਉਹ ਰੀਤ ਛੱਡਦੇ ਹੋ ਠੀਕ ਪਿਆਰਾ ਦਾ ਭਾਵ ਮੂਲ ਹੋ ਗਿਆ ਆਪਣਾ ਬੂਲ ਛੱਡ ਨਾਲ ਇਦੇ ਨਾਲ ਪਿਆਰ ਹੀ ਵਿਸਰ ਗਿਆ ਦੁਨੀਆ ਦਾ ਸਾਰੇ ਪਿਆਰ ਹੀ ਵਿਸਰ ਗਿਆ ਨਾ ਕੋਈ ਵੈਰੀ ਨਾ ਹਰਦਾ ਨਹੀਂ ਵਿਸਰ ਗਿਆ ਐਸੀ ਰੀਤ ਨੂੰ ਕਿਉਂ ਵੀ ਛਾੜ ਦਿੰਦੇ ਠੀਕ ਹੈ ਨਾਨਕ ਸਾਈ ਭਲੀ ਪ੍ਰੀਤ ਜਿਤ ਐਸੀ ਪਤ ਰਹੈ ਜਿਹਦੇ ਨਾਲ ਹੋਵੇ ਆਇਬ ਦੇ ਨਾਲ ਪ੍ਰੀਤ ਬਣੀ ਪਤ ਰਹੈ ਸਾਹਿਬਾ ਪਤ ਕਦਰ ਹੋਊਗੀ ਜਦ ਆਮਦੇ ਜੰਦੇ ਬੁਰਾ ਨਹੀਂ ਕੋਈ ਸਰਬੱਤ ਦਾ ਭਲਾ ਇੱਕ ਬਿਤਾਇਆ ਕਰਕੇ ਆਪ ਬਾਹਰ ਕੋ ਫਿਰ ਹੋਊਗੀ ਪਤ ਸਾਹਿਬ ਨੂੰ ਫਿਰ ਸਾਹਿਬ ਨੇੜੇ ਬਿਠਾ ਲੂਗਾ ਸਾਹਿਬ ਦੇ ਸਭ ਆਦੀ ਗੱਲ ਕਰੋ ਨਾ ਜਾਏਗਾ ਸਾਹਿਬ ਚਾਹੁੰਦਾ ਉਹਦੀ ਗੱਲ ਕਰੋ ਠੀਕ ਹੈ ਜੀ ਤੇ ਚਾਹੁੰਦਾ ਸਾਹਿਬ ਉਹ ਤੁਸੀਂ ਗੱਲ ਹੀ ਕਰਦੇ ਗੱਲ ਤਾਂ ਉਹ ਉਲਟ ਕਰਦੇ ਹੋ ਉਹ ਤੋਂ ਨੇੜੇ ਕਿ ਮੈਂ ਕਰਾਂ ਦੇਉ ਕੋ ਤਾਲੀ ਰੋ ਉਹ ਵੀ ਜੋ ਸਾਹਿਬ ਚਾਹੁੰਦਾ ਉਹ ਕਰੋ ਜੋ ਸਾਹਿਬ ਚਾਹੁੰਦਾ ਉਹ ਬੋਲੀ ਬੋਲੋ ਠੀਕ ਹੈ ਜੀ ਪੌੜੀ ਹਰ ਇੱਕ ਉਹ ਦਾਤਾ ਸੇਵੀ ਹੈ ਹਰ ਇੱਕ ਧਈ ਹੈ ਹਰ ਇੱਕ ਉਹ ਦਾਤਾ ਮੰਗੀ ਹੈ ਮਨ ਚਿੰਦਿਆ ਪਾਈ ਹੈ ਹਰ ਇੱਕ ਉਹ ਦਾਤਾ ਇੱਧਰ ਤਾਂ ਦਾਤਾ ਬਗਾਨਾ ਤੁਸੀਂ ਕਿੱ데 ਪ੍ਰਚਾਰੇ ਹੋਏ ਕੁਝ ਕਹਿੰਦਾ ਇੱਥੋਂ ਮਿਲਦੀਆਂ ਨੇ ਕੁਝ ਕਹਿੰਦਾ ਇੱਥੋਂ ਮਿਲਦੀਆਂ ਨੇ ਕੁਝ ਤਾਂ ਦੁਕਾਨਦਾਰੀਆਂ ਬਣਾਈਆਂ ਹੋਈਆਂ ਨੇ ਅਰੇ ਇੱਕੋ ਦਾਤਾ ਸੇ ਵੀ ਹਰ ਇੱਕ ਤੇ ਆਈ ਹੈ ਉਹ ਸੇ ਵਿੱਚ ਧਿਆਨ ਰੱਖੀਏ ਸਦਾ ਦਾਤਾ ਉੱਥੇ ਮਿਲਣਾ ਨਾਮ ਜਿੱਥੋਂ ਨਾਮ ਮਿਲਣਾ ਉਹ ਟਾਰਗੇਟ ਉੱਥੇ ਬਣਾ ਕੇ ਰੱਖੋ ਉੱਥੇ ਧਿਆਨ ਕੋ ਜੋੜ ਕੇ ਜਿੱਥੇ ਨਾਮ ਮਿਲਣਾ ਔਰ ਇੱਕੋ ਹੀ ਦਾਤਾ ਸੇ ਹੈ ਹਰ ਇੱਕ ਹੈ ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ਹਰ ਇੱਕੋ ਦਾਤਾ ਹੁੰਦੀ ਐ ਕੋਈ ਦਾਤਾ ਦਾਦਾ ਦਾਤਾ ਸਭ ਕੋ ਦੇ ਬਣਹਾਰ ਉਹ ਇੱਕੋ ਦਾਤਾ ਉਹ ਤੋਂ ਹੀ ਤੋਂ ਉਪਰ ਬਿਰੋ ਬੁੱਝ ਗਏ ਸਭ ਕੋ ਜਾਣਦਾ ਉਹ ਤੋਂ ਹੀ ਬੁੱਝਿਓ ਆਣਾ ਜਾਣਦਾ ਸਭ ਕੁਝ ਬਿਰੋ ਬੁੱਝ ਕੋ ਲੈ ਸਭ ਕੁਝ ਪਰ ਬੁੱਝਿਆ ਹੋ ਤਾਂ ਹੋਰ ਤੋਂ ਨਾ ਦੁੱਧ ਲਿਓ ਕਿਤੇ ਜਾ ਸਪਾਰਸ ਨਾ ਫਾਇਆ ਲਿਓ ਫਿਰ ਪੈ ਜੂਗਾ ਮਨ ਚਿੰਦਿਆ ਪਾਈ ਇਹਦਾ ਵੀ ਮੰਨ ਦੀ ਅਰਸ਼ਾ ਸਾਰੀਆਂ ਪੂਰੀਆਂ ਹੋ ਜਾਣੇ ਉੱਥੋਂ ਹੀ ਹੋ ਜਾਣੇ ਉਦੋਂ ਹੀ ਕੋਲੋਂ ਗੁੱਦੋ ਕੁੱਤ ਦੇ ਆ ਭਾਈਆ ਲਾਜ ਮਰਾਈਏ ਦੂਜੇ ਪਾਸਾ ਮੰਗਾ ਹੋਏ ਤੇ ਸ਼ਰਮਿੰਦੀ ਮੌਤ ਬਣੋਗੇ ਮਿਲਣਾ ਕੁਛ ਨਹੀਂ ਸਈ ਸ਼ਰਮਾਂ ਦੀ ਮੌਤ ਬਣਨਾ ਪਊਗਾ ਠੀਕ ਹੈ ਜੀ ਜਿੰਨ ਸੇਵਿਆ ਤਿੰਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਐ ਨਾਨਕ ਤਿੰਨ ਵਿਟੋ ਵਾਰਿਆ ਜਿਨ ਆਂਗਨ ਹਿਰਦਾ ਹਰ ਨਾਮ ਧਿਆਈਐ ਦੇਖੋ ਜਿਹੜਾ ਇੱਕ ਡਾਟਾ ਹੈ ਉਹਦੀ ਸੁਣੋ ਗੱਲ ਐਵੇਂ ਨਹੀਂ ਅਸੀਂ ਕਹਤੀ ਇਹ ਗੱਲ ਤੋਂ ਜਿਨਾ ਉਹਨੂੰ ਸੇਵਿਆ ਤਿੰਨ ਫਲ ਵੀ ਪਾਇਆ ਹੈ ਐਸਾ ਕੋਈ ਰਿਕਾਰਡ ਦੱਸੋ ਕਿ ਸੇਵਿਆ ਹੋਵੇ ਉਹ ਡਾਟਾ ਜਿਹੜਾ ਇੱਕ ਹੈ ਉਸ ਬਿਹਾ ਨਾ ਹੋਵੇ ਕੋਈ ਰਿਕਾਰਡ ਤਾਰੇ ਕੋਈ ਕੋਆਰਡੀਨੇਟ ਉੱਪਰ ਹੁਸਤਾ ਜੀ ਦੀ ਜਿੰਨੇ ਉਹ ਫੇਰਿਆ ਉਹ ਭੜਿਆ ਇਸ ਕਰਕੇ ਤੁਸੀਂ ਉੱਥੇ ਦੇਵੋ ਉਹ ਤੋਂ ਕੋਈ ਵਜ੍ਹਾ ਨਹੀਂ ਦੋ ਗਵਾਈ ਹੈ ਇਹ ਫੇਰੀ ਦੇ ਅਰਥ ਸਹੀ ਬਣ ਗਏ ਜਿਸ ਸਭ ਭੁੱਖ ਗਵਾਈ ਹੈ ਉਹ ਉਹ ਦੀ ਸਾਰੀ ਭੁੱਖ ਗਵਾਤੀਆਂ ਕੋਈ ਭੁੱਖ ਛੱਡੀ ਹੋਈ ਨਹੀਂ ਸਭੇ ਪੂਰੀਆਂ ਜਾਂ ਪਾਇਆ ਆਦਮਾ ਪਾਣ ਸਾਰੀਆਂ ਇੱਛਾ ਪੂਰੀਆਂ ਹੋਣੀਆਂ ਕੋਈ ਇਛਾ ਰਹੀ ਹੋਈ ਨਹੀਂ ਸਭੇ ਇੱਛਾ ਆ ਜਾਂ ਪਾਇਆ ਅਗਮਾ ਪਾਰਾ ਹੈ ਤਾਂ ਜਿਹਨਾਂ ਜਿਹਨੇ ਪਾਇਆ ਉਹ ਕਹਿ ਰਹੇ ਹੈ ਇਹਨੂੰ ਪ੍ਰਾਪਤ ਹੋ ਗਿਆ ਤਾਂ ਇਹ ਚ ਕਹਿ ਰਹੇ ਹੈ ਕਿ ਮੈਨੂੰ ਇਹ ਪ੍ਰਾਪਤ ਹੋ ਗਿਆ ਹਾਂਜੀ ਹਾਂਜੀ ਕੋਈ ਸੁਣੀ ਸੁਣਾਈ ਗੱਲ ਨਹੀਂ ਆਪਣਾ ਤਜਰਬਾ ਹੈ ਨਾ ਜੀ ਅੱਡ ਬੀਤੀ ਪੂਰੀ ਠੀਕ ਹੈ ਨਾਨਕ ਦਿਨ ਵਿਟੋ ਵਾਰਿਆ ਜਿਨ ਆਂਦਿਨ ਹਿਰਦੈ ਹਰ ਨਾਮ ਧਿਆਈ ਐ ਆ ਕਰਮ ਇਹਨਾਂ ਨੇ ਦਿਲ ਦਾ ਸਤਿਅਮ ਧਿਆਨ ਕਰਕੇ ਰੱਖਿਆ ਉਹਦੇ ਤੇ ਡੋਰੀ ਰੱਖੀ ਐ ਜੋ ਤੋਂ ਗੁਰਬਾਨ ਜਨ ਇਹਨਾਂ ਨੇ ਗੱਲ ਸੁਣ ਕੇ ਗੁਰਬਾਨੀ ਦੀ ਇਹਨੇ ਧਿਆਨ ਉੱਥੇ ਹੀ ਲਿਆ ਤੂੰ ਦਇਆ ਨੂੰ ਬਹਿੰਦਾ ਜਾ ਦਾ ਹੈਗਾ ਜਾਂ ਤੇਰੀ ਰਜਾ ਹੁੰਦਾ ਤੇਰੀ ਨਾਲ ਕੋ ਨੂੰ ਤੁਰ ਅਡੋ ਨਵਸਤਾ ਜੋ ਕੇ ਬਗ ਗਿਆ ਉਹਨਾਂ ਨੇ ਉਹਨਾਂ ਦਾ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਨਾਮ ਧਿਆਇਆ ਹੈ ਜਿਨ੍ਹਾਂ ਨੇ ਨਾਮ ਦੇ ਵਿੱਚ ਧਿਆਨ ਰੱਖਿਆ ਵੀ ਕਿ ਕਿ ਜੀ ਇੱਥੇ 10ਵੀਂ ਪੌੜੀ ਸਮਾਪਤ ਹੋਈ ਜੀ